ਜਿਸ ਵਕਤ ਇਹ ਗੱਲ ਹੋਈ ਗੁਰੂ ਅਰਜਨ ਦੇਵ ਤੇ ਮਾਤਾ ਗੰਗਾ ਜੀ ਦੋਵੇਂ ਸਾਧ ਸੰਗਤ ਦੇ ਕੋਲ ਪਹੁੰਚ ਗਏ ਨੇ ਉਹਨਾਂ ਨੇ ਅੱਗੇ ਦਰਸ਼ਨ ਹੀ ਨਹੀਂ ਕੀਤਾ ਉਹ ਪਹਿਲੀ ਵਾਰੀ ਅਜੇ ਦਰਸ਼ਨ ਕਰਨ ਆਏ ਸਨ ਸਾਥ ਦੇ ਤੇ ਜਦੋਂ ਨਾਨਾ ਕਈਆਂ ਦਰਸ਼ਨ ਕੀਤਾ ਤਾਂ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਇਹ ਹੀ ਗੁਰੂ ਆ ਇਹ ਸਤਗੁਰਾਂ ਨਾਲ ਜਿਹੜੇ ਬੈਠੇ ਤੁਹਾਡੇ ਸਾਹਮਣੇ ਇਹ ਇੱਕ ਵਾਰੀ ਉੱਥੇ ਮੈਂ ਹੁੰਦਾ ਸਾਂ ਡੇਰੇ ਰੂੜੇ ਚ ਜਿੱਥੇ ਉੱਥੇ ਇਹਨਾਂ ਨੇ ਚਰਨ ਪਾਏ ਤੇ ਹਫ਼ਤਾ ਰਹਿਣ ਸਾਡੇ ਨਾਲ ਦਰਸ਼ਨ ਦਿੱਤੇ ਤੇ ਉਦੋਂ ਬਲਕਾਰ ਸਿੰਘ ਇਹਨਾਂ ਦੇ ਨਾਲ ਸੇਵਕ ਸੀ ਤੇ ਗੱਡੀ ਪੀਛਾ ਖਰਾਬ ਹੋ ਗਈ ਤੇ ਗੱਡੀ ਖਰਾਬ ਹੋ ਗਈ ਤੇ ਤੁਰੇ ਜਾਂਦੇ ਸਨ ਤੇ ਤੁਰੇ-ਤੁਰੇ ਜਾਂਦੇ ਨਾਲ ਇੱਕ ਮੁੰਡੇ ਸੰਦੋ ਤੇ ਨਾਲ ਜੇ ਕਿ ਉਹਨਾਂ ਨੂੰ ਇਹ ਪੁੱਛਦੇ ਨੇ ਇਹ ਉਹ ਨੂੰ ਜਾਣਦੇ ਹੋ ਇਹ ਪੋਛਦੇ ਨੇ ਪੰਡਤ ਨੂੰ ਜਾਣਦੇ ਹੋ ਕਿ ਭਗਵਾਨ ਨੇ ਆਹੋ ਜੀ ਮੈਂ ਜਾਣਦਾ ਜਿਹੜਾ ਗੁਰੂ ਜਗਜੀਤ ਸਿੰਘ ਨਾਂ ਰਹਿਂਦਾ ਚੁੱਪ ਕਰਕੇ ਖੰਡ ਪਾਠ ਹੁੰਦਾ ਸੀ। ਤੇ ਇਹਨਾਂ ਆਖਿਆ ਸੂਬਾ ਨੇ ਦੱਸਿਓ ਨਾ ਪੰਡਤ ਨੂੰ ਤੇ ਉਹਨੂੰ ਜਾ ਕੇ ਆਖੋ ਕਿ ਤੈਨੂੰ ਕੋਈ ਬਾਹਰ ਮਿਲਨ ਵਾਲਾ ਆਇਆ। ਸੂਬਾ ਮੇਰ ਸਿੰਘ ਬਾਹਰ ਆ ਗਿਆ ਤੇ ਅੰਦਰ ਚਲੇ ਗਿਆ ਜਿੱਥੇ ਖੰਡ ਪਾਠ ਸੀ ਨਾ ਕੋਈ ਆਸਨ ਤੇ ਐਸੇ ਤਰ੍ਹਾਂ ਪੱਟੀ ਸੀ ਵਿਛੀ ਤੇ ਪਤੀ ਉੱਤੇ ਜਾ ਕੇ ਬਗੈਰ ਹੀ ਆਸਨ ਤੋਂ ਚੁੱਪ ਕਰਕੇ ਬਹਿ ਗਿਆ। ਕਿ ਜੇ ਉਸ ਵਕਤ ਸੁਭਾਜੀ ਨੇ ਮੈਨੂੰ ਆਖਿਆ ਹੈ ਪੰਡਤ ਜੀ ਮੈਂ ਆਖਿਆ ਹਾਂ ਜੀ ਅਏ ਤੁਹਾਨੂੰ ਇੱਕ ਆਦਮੀ ਮਿਲਣ ਵਾਲਾ ਮਹਕਾਣ ਮਿਲਣ ਵਾਲਾ ਮੈਨੂੰ ਉਹਨੂੰ ਇੱਥੇ ਆ ਜਾ ਕਹਿੰਦਾ ਨਹੀਂ ਜੀ ਤੁਸੀਂ ਬਾਹਰ ਆ ਜਾਓ ਮੈਂ ਆਖਿਆ ਉਹ ਕਿਹੜਾ ਹੈ ਮੈਨੂੰ ਪਤਾ ਨਹੀਂ ਮੈਂ ਝੂਠ ਬੋਲ ਦਿਓ ਮੇਰੇ ਨਾਲ ਤੁਹਾਡੀ ਬਹੁਤੀ ਬਾਖਸ਼ੀਤ ਇੱਥੇ ਆਖਰ ਜੇ ਵਕਤ ਮੈਂ ਬਾਹਰ ਨੂੰ ਨਿਕਲੇ ਉਧਰ ਤਾਂ ਅਸੀਂ ਹੋਈ ਮੇਰੇ ਘਰੋਂ ਉਹ ਅੱਗੇ ਪਰਲੇ ਪਾਸੇ ਖਲੋਤੀ ਸੀ ਤੇ ਉਸ ਨੇ ਕਿਤੇ ਸਤਗੁਰਾਂ ਨੂੰ ਜਾਂੀਆਂ ਨੂੰ ਦੇਖ ਲਿਆ ਸੀ ਐਡਾ ਅੰਤਰਜਾਮੀ ਤੇ ਮੈਂ ਵੀ ਨਹੀਂ ਸਾਬਿਆਵੇਂ ਆਖਾ ਉਸ ਨੇ ਲਿਆ ਵੀ ਸਤਗੁਰਾਂ ਦਾ ਜੋੜਾ ਚਿੱਟਾ ਤੇ ਮੈਂ ਲੰਘਣ ਲੱਗਾ ਤੇ ਮੈਨੂੰ ਆਦੀ ਐਵੇਂ ਜਾਦੇ ਅੰਦਰ ਲੰਘ ਗਏ ਜਦੋਂ ਮੈਂ ਅੰਦਰ ਗਿਆ ਨਾ ਤੇ ਫਿਰ ਮੈਨੂੰ ਪਤਾ ਹੀ ਲੱਗ ਗਿਆ ਸੀ ਵੀ ਸਤਗੁਰ ਆ ਗਏ ਨੇ ਮੈਂ ਉੱਠ ਕੇ ਨਾ ਜਾਕ ਨਾ ਤੇ ਧਮਾਲੀ ਸੀ ਮੇਰੇ ਕੋਲ ਮੈਂ ਆਖਿਆ ਸੱਚ ਪਾਸ਼ਾ ਉਸ ਤੋਂ ਜਿਹੜਾ ਮੇਰਾ ਮਹਾਰਜੀ ਪਾਸ਼ਾ ਤੇ ਮੈਂ ਫਿਰ ਉੱਥੇ ਇਹ ਚੀਜ਼ ਬੜੀ ਮੈਚਿਆ ਤਾਰ ਕਾ ਮੰਡਲ ਮੈਂ ਚਾਪ ਛੁਪੇ ਨਾ ਤੇ ਸੂਰ ਛੁਪੇ ਨਹ ਬਾਦਰ ਛਾਏ ਰਣ ਜੁਗਧ ਚੜੇ Rajput ਛੁਪੇ ਨਹ ਦਾਤਾ ਛੁਪੇ ਨਹ ਜੇ ਜਾਏ ਚੰਚਲ ਨਾਰ ਕੇ ਨੈਣ ਛੁਪੇ ਨਹ ਛੁਪੇ ਨਹ ਪੀਠ ਫਰਾਏ ਤੇ ਕਹਿ ਕਬ ਗੰਗ ਸੁਨੋ ਸ਼ਾ ਅਕਬਰ ਤੇ ਪ੍ਰੀਤ ਛੁਪੇ ਨਾ ਦਿਖਾਏ ਮੈਂ ਆਖਿਆ ਤੁਸੀਂ ਛੁਪ ਨਹੀਂ ਸਕਦੇ ਤਾਰਿਆਂ ਵਿੱਚ ਤੁਸੀਂ ਚੰਦਰਮਾ ਮੈਂ ਆਖਿਆ ਜੀ ਸਾਥ ਸੰਗਦੀ ਆਓ ਸਤਿਗੁਰਾਂ ਦਾ ਦਰਸ਼ਨ ਕਰ ਲਓ ਸੰਗਤ ਫਿਰ ਉਸੇ ਦਾ ਮੇਰਾ ਮਤਲਬ ਸਿਰਫ ਕਹਿਣ ਤੋਂ ਇਹ ਸੀ ਕਿਈ ਵਾਰੀ ਜਿਹੜੇ ਨਹੀਂ ਹੁੰਦੇ ਜਾਂਦੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਇਹ ਸਤਿਗੁਰ ਹੈ ਕਿ ਨਹੀਂ ਇਸ ਵਾਰ ਉਹਨਾਂ ਦੀਆਂ ਕਈ ਗੱਲਾਂ ਆਸੀ ਹੋਈ ਉਹਨਾਂ ਨੂੰ ਅੱਗੇ ਪਤਾ ਨਹੀਂ ਸੀ ਉਹਨਾਂ ਅੱਗੇ ਸਤਿਗੁਰਾਂ ਦਾ ਦਰਸ਼ਨ ਦੀ ਸੀ ਕੀਤਾ ਪਹਿਲੀ ਵਾਰੀ ਆਏ ਸਨ ਤੇ ਸਤਿਗੁਰ ਜਾ ਕੇ ਮਾਤਾ ਗੰਗਾ ਜੀ ਨੂੰ ਕਹਿੰਦੇ ਨੇ ਪੇ ਲੋ ਜੀ ਤੁਸੀਂ ਤੇ ਹੁਣ ਪਾਣੀ ਪਾਓ ਤੇ ਮੈਂ ਇਹਨਾਂ ਦੇ ਚਰਨ ਧੋਣਾ ਸਾਰਿਆਂ ਦੇ ਚਰਨ ਧਵਾ ਤੂ ਕੇ ਤੇ ਕੜਾਪਸ਼ਾ ਦੇ ਕੇ ਸੰਗਤਾਂ ਨੂੰ ਸ਼ਿਕਾ ਕੇ ਸੰਗਤਾਂ ਥੱਕੀਆਂ ਸਾਰ ਸੰਜੀ ਥੱਕੇ ਨੂੰ ਜਦੋਂ ਕੋਟਦਾ ਫਿਰ ਆਨੰਦ ਆ ਜਾਂਦਾ ਕਿ ਉਹ ਕੁੱਟਿਆ ਤੇ ਬੋੜਾ ਨੂੰ ਸੁਖਿਆ ਤੇ ਮਾਤਾ ਜੀ ਨੂੰ ਆਂਦੇ ਮਾਤਾ ਜੀ ਦਾ ਜਦ ਲਫਜ਼ ਆਗਾ ਉਹ ਮੈਂ ਆਪਣੇ ਆਨੇ ਨਾ ਸਮਝੋ ਪਈ ਗੁਰੂ ਅਰਜਨ ਦੀ ਮਾਤਾ ਜੀ ਇਹਨਾਂ ਉਹਨਾਂ ਦੇ ਮਹਿਲ ਸੰਮਾ ਦਾ ਤੁਹਾਡੇ ਭਲੇਖਾ ਨਾਲ ਕੋਈ ਪੈ ਜਾਏ ਮਾਤਾ ਜੀ ਨੂੰ ਆਉਂਦੇ ਨੇ ਵੀ ਤੁਸੀਂ ਨਾ ਐਸ ਵਕਤ ਇਹਨਾਂ ਨੂੰ ਮਾਇਆਂ ਨੂੰ ਘੁੱਟੋ ਤੇ ਮੈਂ ਸਿੱਖਾਂ ਨੂੰ ਘੁੱਟਣਾ ਸਾਰੀ ਰਾਤ ਮਾਤਾ ਜੀ ਮਾਇਆਂ ਨੂੰ ਘੁੱਟਦੇ ਰਹਿ ਕਿੱਥੇ ਉਹ ਸੇਵਾ ਗਈਆਂ ਕਿੱਥੇ ਏਡੀ ਵੱਡੀ ਘਰ ਘਾਲੀ ਹੁੰਦੀ ਸੀ ਉਹ ਮਾਇਆਂ ਨੂੰ ਘੁੱਟਦੇ ਰਹਿ ਸਭ ਨੂੰ ਸਿੱਖਾਂ ਨੂੰ ਘੁੱਟਦੇ ਰਹਿ ਆਖਰ ਅੰਮ੍ਰਿਤ ਵੇਲਾ ਜਦੋਂ ਅੰਮ੍ਰਿਤ ਵੇਲਾ ਹੋ ਗਿਆ ਤੇ ਸੱਚ ਪਾਤਸ਼ਾਹ ਸਾਧ ਸੰਗਤ ਜੀ ਉਠੋ ਠਨਾਨ ਕਰੋ ਕੀ एकदम ਸ਼ੁਰੂ ਹੋ ਜਾਣਾ ਚੱਲ ਕੇ ਕੀਰਤਨ ਸੁਣੋ ਤੇ ਸਾਰੀ ਸੰਗਤ ਉੱਠੀ ਉਹਨਾਂ ਨੇ ਇਸ਼ਨਾਨ ਪਾਣੀ ਕੀਤਾ ਤੇ ਸਾਰੇ ਸਾਰੀ ਸੰਗਤ ਤੇ ਮਾਤਾ ਜੀ ਨੂੰ ਇਸ਼ਾਰਾ ਕੀਤਾ ਤੇ ਚਲੋ ਤੇ ਮੈਂ ਤੇ ਸਿੱਧਾ 'ਤੇ ਨਾਲੇ ਰਾਤ ਸਾਰੀ ਨਾਗਾ ਸੌਏ ਆਦਮੀ ਇੱਕ ਵਾਰੀ ਸੰਤਾ ਚੁੰਡੇਵਾਲਾ ਤੇ ਇਹ ਸਮਝੋ ਸ਼ਿਕਾਇਤ ਹੋਈ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਇਸ਼ਨਾਨ ਨਹੀਂ ਕਰਦੇ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਜਦੋਂ ਸਾਰੀ ਰਾਤ ਸੌਂਦੇ ਨਹੀਂ ਤੇ ਫਿਰ ਨਾ ਵੀ ਇਸ਼ਨਾਨ ਕਰਨ ਤੇ ਕੋਈ ਗੱਲ ਨਹੀਂ ਜੋ ਸੁੱਤੇ ਹੀ ਨਹੀਂ ਤੇ ਫੇਰ ਕੀ ਗੱਲ ਆ ਜਾਗਦੇ ਤੇ ਚਲੇ ਗਏ ਸੱਚੇ ਪਾਤਸ਼ਾਹ ਜਦੋਂ ਸਿੱਖਾਂ ਦੇ ਨਾਲ ਆਏ ਨਾ ਅੱਗੇ ਸੁਦਾ ਸਰੋਵਰ ਇਸ਼ਨਾਨ ਕਰਨਾ ਸੀ ਤੇ ਐਸੇ ਸਰੋਵਰ ਹੁਣ ਉਹਦੇ ਪਾਸੇ ਗੁਲਿਆਰਾ ਬਣ ਗਿਆ ਕਦੇ ਕੁਝ ਬਣ ਗਿਆ ਸੀ ਕਿੰਨਾ ਕੁਝ ਉਹਦੇ ਤੇ ਐਵੇਂ ਥੋੜਾ ਜਿਹਾ ਇਸ ਨਾ ਉਥੇ ਨਾ ਇਸ ਤਰ੍ਹਾਂ ਦੇ ਪਹਿਰੇਦਾਰ ਹੁੰਦੇ ਹਨ ਉਹ ਆਉਂਦੇ ਨਹੀਂ ਪੀ ਇੱਥੇ ਝੋੜੇ ਲਾ ਜਾਈਏ ਕੱਪੜੇ ਲਾ ਜਾਈਏ ਤੇ ਇਸ਼ਨਾਨ ਕਰਾਈਏ ਆਪੋ ਜਾਂਦੇ ਨੇ ਦੋਨ ਭਾਈ ਇੱਥੇ ਕੱਪੜੇ ਦੀ ਰਾਖੀ ਕਰਨ ਵਾਲੇ ਜੋੜੀਆਂ ਦੀ ਗੱਲ ਕਰਾਖੇ ਤੇ ਅਸੀਂ ਸ਼ਰਾਨ ਕਰਾਂਵੇਂ ਤੇ ਤੂੰ ਫਿਰ ਘਰੇ ਆਉਂਦਾ ਮੈਂ ਇਕੱਲਾ ਚੱਠੀ ਜਾਵਾਂਗਾ ਕਿਸੇ ਹੋਰ ਨੂੰ ਆਖ ਦਿਓ ਦਾ ਯਾਰ ਬੜਾ ਪ੍ਰੇਮੀ ਹਾਸਾ ਨਹੀਂ ਫੰਗ ਘੁੱਟਦਾ ਰਹੇ ਇਹਨੂੰ ਆਖਾ ਸਾਡੇ ਜੁੱਤੀਆਂ ਦੀ ਰਾਖੀ ਕਰੀ ਕਰੀ ਆਹਾਹਾ ਸਮਝੀ ਗੱਲ ਆਖੀ ਨਾ ਸਿੱਖ ਨੇ ਸਤਿਗੁਰ ਸੱਚੇ ਪਾਤਸ਼ਾਹ ਦੇ ਪਲਕਾਾਂ ਆ ਗਈ ਕਹਿੰਦੇ ਨਾ ਸਿੱਖੋ ਮੇਰੇ ਬਹੁਤ ਧੰਨ ਪਾਗੋ ਜੇ ਤੁਹਾਡੇ ਜੋੜਿਆਂ ਦੀ ਰਾਖੀ ਮੈਨੂੰ ਮਿਲ ਜਾਵੇ। ਉਹ ਮੈਂ ਬੜਿਆ ਭਾਗਾ ਵਾਲਾ ਆਪਣੇ ਆਪ ਨੂੰ ਗਿਣਾਂਗਾ ਜੇ ਤੁਹਾਡੇ ਜੋੜਿਆਂ ਦੀ ਰਾਖੀ ਮੈਨੂੰ ਮਿਲ ਜਾ ਜਾਓ ਗੁਰਮਖੋ ਜਾ ਕੇ ਤੁਸੀਂ ਇਸ਼ਨਾਨ ਕਰੋ ਤੇ ਮੈਂ ਤੁਹਾਡੇ ਜੋੜਿਆਂ ਦੀ ਤੇ ਕੱਪੜਿਆਂ ਦੀ ਰਾਖੀ ਕਰਾਂ। ਸਾਧ ਸੰਗਤ ਸਤਗੁਰ ਉੱਤੇ ਜੋੜਿਆਂ ਦੀ ਰਾਖੀ ਕਰਦੇ ਨੇ, ਕੱਪੜਿਆਂ ਦੀ ਰਾਖੀ ਕਰਦੇ ਨੇ, ਸਾਧ ਸੰਗਤ ਇਸ਼ਨਾਨ ਕਰਨ ਲਈ ਵੀ ਆ ਤੇ ਉਹ ਜਾ ਕੇ ਇਸ਼ਨਾਨ ਕਰ ਕਰ ਹੌਲੀ ਜੀ ਆਸਾ ਦੀ ਨੂੰ ਤੁਰੇ ਜਾਂਦੇ ਨੇ ਤੇ ਸੱਚੇ ਪਾਤਸ਼ਾਹ ਸਾਧਾਂ ਦੇ ਜੋੜੇ ਪੁੰਝ ਪੁੰਝ ਕੇ ਤੇ ਬਾਹਰ ਤਰਤੀਬ ਧਰੀ ਜਾਂਦੀ। ਜਦੋਂ ਜੀ ਆਸਨ ਦੇ ਉੱਤੇ ਗਿਆ ਜਿੱਥੇ ਸਤਗੁਰਾਂ ਬਹਿਣਾ ਸੀ ਉੱਥੇ ਜਾ ਕੇ ਦਰਸ਼ਨ ਕੀਤਾ ਜਿਸ ਤਰ੍ਹਾਂ ਸੰਤ ਗਿਆਨਾ ਸ੍ਰੀ ਜਾਂ ਹੋਰ ਅੱਜਕੱਲ ਦੇ ਜਿਹੜੇ ਸਤਗੁਰਾਂ ਦੇ ਸੇਵਕ ਨੇ ਉਹ ਸਤਗੁਰਾਂ ਦੇ ਆਉਣ ਤੋਂ ਪਹਿਲਾਂ ਆਸਨ ਵਿਛਾ ਕੇ ਰੱਖਦੇ ਨੇ ਤੇ ਆਲ ਕੋ ਆਪ ਜਾਂਦੇ ਨੇ ਬਾਬਾ ਬੁੱਢਾ ਜੀ ਵੀ ਸਾਰਿਆਂ ਨਾਲ ਪਹਿਲਾਂ ਆ ਕੇ ਸਤਗੁਰਾਂ ਦਾ ਆਸਨ ਵਿਛਾ ਦਿੱਤਾ ਤੇ ਕੋਲ ਬੈਠੇ ਹਨ ਉਹਨਾਂ ਨੂੰ ਪਤਾ ਸੀ ਵੀ ਬਾਬਾ ਜੀ ਨੂੰ ਪਿਓ ਆਖ ਕੇ ਗਏ ਨੇ ਆਸਨ ਵਿਛਾ ਕੇ ਬੈਠੇ ਨੇ ਵੀ ਸਤਗੁਰਾਂ ਆ ਕੇ ਆ ਸਕਦੇ ਆ ਇਹਨੇ ਸੰਗਤ ਵੀ ਆ ਗਈ ਜਦੋਂ ਸੰਗਤ ਆ ਗਈ ਤੇ ਉਹਨਾਂ ਨੇ ਆਸਨ ਤੇ ਆ ਕੇ ਵੇਖਿਆ ਤੇ ਸਾਧਗੁਰ ਕੋਈ ਨਹੀਂ ਆਸਨ ਤੇ ਹੈਰਾਨ ਪਰੇਸ਼ਾਨ ਹੋ ਗਿਆ ਆ ਜਾਂਦੇ ਦੇ ਮਨਾਂ ਵਿੱਚ ਕੋਈ ਕੁਝ ਆਂਦਾ ਕੋਈ ਕੁਝ ਕਹਿੰਦਾ ਤੇ ਇੱਕ ਜਣਾ ਪੁੱਛਦਾ ਬਾਬਾ ਜੀ ਬੈਠਿਆ ਨੇ ਬਾਬਾ ਬੁੱਢਾ ਜੀ ਸਾਧਗੁਰ ਕਿੱਥੇ ਨੇ ਅੱਜ ਕੋਈ ਬੜੇ ਵੱਡੇ ਕੰਮ ਚਲੇ ਗਏ ਨੇ ਜਿਹੜੇ ਆਏ ਨਹੀਂ ਉਹ ਕਹਿੰਦੇ ਨੇ ਭਾਈ ਗੁਰਮਖੋ ਸੱਚੇ ਪਾਤਸ਼ਾਹ ਪਿਪਲੀ ਸਾਹਿਬ ਰਾਤੀ ਕਾਬਲੋਂ ਸੰਗਤ ਆਈ ਸੀ ਉਹਨਾਂ ਦੀ ਸੇਵਾ ਕਰਨ ਗਏ ਸਨ ਉੱਥੇ ਗਏ ਨੇ ਤੇ ਅਜੇ ਆਏ ਨਹੀਂ ਉਹ ਕਹਿੰਦੇ ਜੂ ਕਿ ਅਸੀਂ ਆ ਜਿਹੜੇ ਉੱਥੋਂ ਆਏ ਆ ਅਸੀਂ ਸਾ ਰਾਤੀ ਪਿਪਲੀ ਵਾਬ ਤੇ ਉਹ ਸਤਿਗੁਰ ਕਿੱਥੇ ਜਾਣਦੇ ਨੇ ਉਹਨਾਂ ਦੇ ਇੰਜੇ ਸੇਵਕ ਨੇ ਉਹਨਾਂ ਨੇ ਇੱਕ ਸਿੱਖ ਕਲਿਆ ਸੀ ਤੇ ਇੱਕ ਮਾਈ ਗਈ ਸੀ ਬੜੀ ਸੇਵਾ ਕੀਤੀ ਉਹਨਾਂ ਸਾਡੀ ਨਾਲੇ ਸਾਨੂੰ ਰਾਤ ਦੀ ਘੁੱਟ ਰਹੇ ਨੇ ਮਾਈ ਮਾਜਾਂ ਨੂੰ ਪੋਠੀ ਦੀ ਰਹੀਏ ਨਾਲੇ ਕੜਾ ਖਵਾਇਆ ਨਾਲੇ ਪਾਣੀ ਗਰਮ ਕਰਕੇ ਲਿਆ ਗਿਆ ਸਰ ਉਹ ਕੋਈ ਹੋਰ ਸਿੱਖ ਹੋਣਾ ਸਤਿਗੁਰੇ ਹੋ ਜਾ ਕਿੱਥੇ ਜਾਣਦੇ ਨੇ ਉਹਨਾਂ ਦੇ ਸੇਵਕ ਬੜੇ ਨੇ ਉਹ ਗਏ ਹੋਣਗੇ ਤੇ ਉਹ ਆਦੇ ਨੇ ਨਹੀਂ ਗੁਰਮਖੋ ਸਤਗੋਰੀ ਸੰਨ ਮੈਨੂੰ ਦੱਸ ਕੇ ਗਏ ਸਨ ਤੇ ਸੱਚੇ ਪਾਲ ਸਾਹਿਬ ਰਾਤ ਦੇ ਉੱਥੇ ਗਏ ਨੇ ਜੇ ਆਏ ਨਹੀਂ ਤੇ ਇੱਕ ਜਨਾਂ ਉਹ ਬਾਬਾ ਜੀ ਗੱਲ ਤੇ ਆ ਜਿਹਦੀ ਤੁਸੀਂ ਗੱਲ ਕਰਦੇ ਹੋ ਉਹਨੇ ਤੇ ਹੀ ਜੁੱਤੀਆਂ ਦੀ ਰਾਖੀ ਪਾ ਕੇ ਬਾਬਾ ਜੀ ਦੇ ਸੰਜੀ ਨੇ ਇਤਰਾਜ ਨਾਲ ਆ। ਆ ਗਈ। ਕਹਿੰਦਾ ਓਏ ਗੁਰਮਖੋ ਉਹ ਤਰਮੋਕੀ ਨਾ ਜਿਹਦੇ ਦਰਸ਼ਨਾਂ ਵਾਸਤੇ ਆਏ ਉਹਨੂੰ ਜੁੱਤੀਆਂ ਦੀ ਰਾਖੀ ਪਾਏ। ਓਏ ਜਿਹਦੇ ਦਰਸ਼ਨਾਂ ਵਾਸਤੇ ਆਏ ਉਹਨੂੰ ਉੱਥੇ ਜੁੱਤੀਆਂ ਦੀ ਰਾਖੀ ਪਾਏ ਹੋ। ਸਾਰੀ ਸੰਗਤ ਵਿਰਾਗ ਵਿੱਚ ਦਸ਼ਾ ਚ ਪਈ। ਵਾਤਾਵਰਨ ਹੀ ਹੋਰ ਹੋ ਗਿਆ ਸਾਰੀ ਸੰਗਤ ਜਿਸ ਵਕਤ ਤੁਰ ਹੈ ਤੇ ਅੱਗੇ ਅੱਗੇ ਬਾਬਾ ਜੀ ਪਿੱਛੇ ਪਿੱਛੇ ਸਾਰੀ ਸੰਗਤ ਤੇ ਜਿਸ ਵਕਤ ਸੱਚੇ ਪਾਤਸ਼ਾਹ ਦੇ ਕੋਲ ਪਹੁੰਚ ਗਿਆ ਤੇ ਜਾ ਕੇ ਵੇਖਿਆ ਜੀ ਸੱਚੇ ਪਾਤਸ਼ਾਹ ਉੱਥੇ ਬੈਠੇ ਨੇ ਤੇ ਸਾਧਾਂ ਦੇ ਜੋੜੇ ਸਾਫ਼-ਸਾਫ਼ ਕਰਕੇ ਧਰੀ ਜਾਂਦੇ ਨੇ ਤੇ ਸੱਚੇ ਪਾਤਸ਼ਾਹ ਦੀ ਚਰਨੀ ਡਿੱਗ ਪੈ ਸਾਰੀ ਸੰਗਤ ਵਿਰਾਜਮਈ ਦਰਸ਼ਾ ਚ ਹੋ ਗਈ ਕਹਿੰਦੇ ਨੇ ਗਰੀਬ ਨੂੰ ਆਜੇ ਕੀ ਕੀਤਾ ਤੁਸਾਂ ਸਾਨੂੰ ਰਾਤੀ ਕਿਉਂ ਨਹੀਂ ਤੁਸਾਂ ਦੱਸਿਆ ਮੈਂ ਤੁਸੀਂ ਮੇਰੇ ਦਰਸ਼ਨ ਕਰਨ ਏਡਾ ਪਾਪ ਸਾਡੇ ਕੋਲ ਕਰਾਇਆ ਜੇ ਤੁਹਾਡੇ ਵਾਸਤੇ ਚੰਗੀ ਗੱਲ ਨਹੀਂ ਤੁਹਾਨੂੰ ਰਾਤੀ ਦੱਸ ਦੇਣਾ ਚਾਹੀਦਾ ਸੀ ਕਿ ਤੁਸੀਂ ਜਿਹੜੇ ਆਇਓ ਮੇਰੇ ਦਰਸ਼ਨ ਕਰਨ ਆਇਓ ਸਾਧੂ ਕਹਿੰਦੇ ਨੇ ਸੁਖੋ ਗੱਲ ਤੇ ਤੁਸੀਂ ਵੀ ਸੱਚੀ ਕਹਿ ਰਹੇ ਹੋ ਪਰ ਜੇ ਮੈਂ ਤੁਹਾਨੂੰ ਦੱਸ ਦਿੰਦਾ ਬਈ ਮੈਂ ਹੀ ਆ ਗੁਰੂ ਜੀ ਦੇ ਦਰਸ਼ਨ ਕਰਿਓ ਤੇ ਆ ਸੇਵਾ ਤੁਹਾਨੂੰ ਮੈਨੂੰ ਦੇਣੀ ਸੀ ਆ ਸੇਵਾ ਤੋਂ ਤੇ ਮੈਂ ਮਨ ਜਾਣਾ ਸੀ ਨਾ ਇਹ ਤੇ ਸੇਵਾ ਤਾਂ ਹੀ ਮਿਲਿਆ ਜੇ ਮੈਂ ਦੱਸਿਆ ਤੇ ਜੇ ਦੱਸ ਦੇਂਦੇ ਉਹ ਤੇ ਫਿਰ ਤੇ ਤੁਸਾਂ ਮੈਨੂੰ ਇਹ ਸੇਵਾ ਨਹੀਂ ਸੀ ਦੇਣੀ ਸੋ ਉਸ ਵਕਤ ਉਸ ਵਕਤ ਭਾਵੇਂ ਇਹ ਪੰਕਤੀ ਉਚਾਰਨ ਕੀਤੀ ਹੋਈ ਸੀ ਤੇ ਨਹੀਂ ਸੀ ਕੀਤੀ ਹੋਈ ਪਰ ਉਸ ਵਕਤ ਫੇਰ ਸਾਰੀ ਸੰਗਤ ਆਂਦੇ ਨੇ ਚਲੋ ਜੀ ਹੁਣ ਆਸਣ ਤੇ ਬੈਠੋ ਅੱਗੇ ਅੱਗੇ ਸੱਚੇ ਪਾਤਸ਼ਾਹ ਤੁਰੇ ਜਾਂਦੇ ਨੇ ਮਗਰ ਮਗਰ ਸੰਗਤ ਤੁਰ ਆਉਂਦੀ ਏ ਤੇ ਪਰਦੇ ਕੀ ਨੇ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 ਸਾਈੜੀ ਮਤ ਜਿਹੜੀ ਉਹ ਸੇਵਾ करके दूर हो ਹੋ है ਏ ਹੁਣ ਇੱਥੇ ਹੀ ਖਤਮ ਕਰਨਾ ਤੇ ਕੱਲ ਨੂੰ ਫੇਰ ਅਗਾਹ ਜੇ ਗੱਲ ਸ਼ੁਰੂ ਕੀਤੀ ਫੇਰ ਕੋਈ ਸਾਖੀ ਤਰ ਪੈਂਦੀ ਏ ਟਾਈਮ ਬਹੁਤਾ ਲੱਗਦਾ ਕੱਲ ਨੂੰ ਫੇਰ ਜੇ ਵਕਤ ਹੋਇਆ ਤੇ ਫੇਰ